महला دجہ نال یانے دوستی وڈاروں سیو نہے پانی اندر لیک جیو تسر تھاو نہ تھے نال یانے دوستی کوئی بچے تو دوستی کردا ہے بچے نو کدی سمجھ ہوندی ہے بے سمجھ ہوتا ہے اس کر کے جڑا مانے بے سمجھ ہے ਇਹਨੂੰ ਕਿਆ ਗੁੱਦ ਨੂੰ ਸੰਬੋਧਨ ਕੀਤਾ ਹੈ ਇੱਕ ਸਿਆਣਾ ਇੱਕ ਆਣ ਦਾਲ ਉਤਪਤੀ ਉਹ ਮੰਦੀ ਗਰਭ ਚ ਹੋਈ ਹੈ ਜਨਮੇ ਦਾ ਗਰਭ ਚ ਹੋਇਆ ਨਹੀਂ ਪਹਿਲਾਂ ਹੈ ਹੀ ਦੀ ਸੀ ਵਿੱਚ ਸਮਾਇਆ ਹੁੰਦਾ ਜਿਹੜਾ ਦੂਜਾ ਉਹ ਸਿਆਣਾ ਉਹ ਵੱਡਾ ਨਾਲ ਦੋਸਤੀ ਦੋਸਤੀ ਕਰੇ ਬੱਚੇ ਨਾਲ ਆਣੇ ਨਾਲ ਜੋ ਅਣਜਾਣ ਹੋਵੇ ਅਗਿਆਲੀ ਹੋਵੇ ਅਗਿਆਲੀ ਕੋ ਇਹ ਆ ਬਾਡਾਰੂ ਸੇ ਰਿਓ ਆ ਜਿਹੜਾ ਬਜ਼ੁਰਗ ਹੋਵੇ ਉਹ ਜਣਾ ਦੇਉ ਕਰ ਬਜ਼ੁਰਗ ਕਹਿੰਦਾ ਦੋ ਚਾਰ ਸਾਲ ਦੀ ਗੱਲ ਹੈ ਰਹਿਣਾ ਦੀ ਉਹ ਤਾਂ ਨਾ ਤੋੜਨਾ ਪੈਂਦਾ ਉਹਦਾ ਫੈੜਾ ਉੱਥੇ ਕਰੇ ਦਾ ਬਾਡਾਰੂ ਸੇ ਰਿਓ ਜੀ ਕੀ ਹੈ ਪਾਣੀ ਦੇ ਵਿੱਚ ਇਹ ਰੀਰ ਖਿੱਚੀਓ ਕਿਤੇ ਰਹੀਦੀ ਹੁੰਦੀ ਹੈ ਯਾਰੇ ਨਾਲ ਦੋਸਤੀ ਟੁੱਟ ਜਾਣੀ ਹੈ ਕਿਉਂ ਉੱਥੇ ਉਹਨਾਂ ਪੁੱਠੇ ਕੰਮ ਕਰ ਲੈਂਦੇ ਨੇ ਤਾਂ ਉੱਥੇ ਲੜਾਈ ਹੋ ਜੜੀ ਤੇਰੀ ਵੀ ਪੁੱਠੇ ਕੰਮ ਕਰੀ ਜਾਂਦਾ ਤੂੰ ਤਾਂ ਛੱਡਣੀ ਪੈਣੀ ਦੋਸਤੀ ਜੋ ਜੀ ਬੜਾ ਬੜਾ ਦੂ ਦਾ ਦਿਨ ਛੱਡਣਾ ਪੈਣਾ ਜਿਵੇਂ ਹੀ ਮਿਟਣ ਵਾਲੀ ਚੀਜ਼ ਇਸ ਕਰਕੇ ਜਿਹੜੀ ਰਹਿਣ ਵਾਲੀ ਚੀਜ਼ ਨੂੰ ਕੱਲੀ ਹੋਣੀ ਚਾਹੀਦੀ ਤੇ ਆਨੇ ਨਾ ਦੋਸਤ ਹੀ ਚਾਹੀਦੀ ਪਰ ਅਸੀਂ ਤਾਂ ਬੱਚਿਆਂ ਨੂੰ ਕਹਿੰਨਾ ਦੋਸਤ ਬਣਾਓ ਆਪਣੇ ਕੁਰਬਾਨੀ 옳 ਕਹਦੀ ਹੈ ਕੁਛ ਅੱਜ ਜੋ ਨੁਕਸਾਨ ਹੋ ਰਿਹਾ ਸਮਾਜ ਦਾ ਇਹ ਗੱਲ ਤੋਂ ਵੀ ਹੋ ਰਿਹਾ ਬਟੌਰਨ ਕਹਿ ਰਹੇ ਨੇ ਕੋਈ ਚੜੂਪਰ ਦੋਸਤ ਬਣਾਓ ਬੱਚੇ ਤੋਂ ਦੋਸਤ ਬਣਾਓ ਬੱਚੇ ਨਾਲ ਹਰ ਗੱਲ ਸ਼ੇਅਰ ਕਰੋ ਹਾਂ ਇਹ ਕਰਕੇ ਜਿਹੜੀ ਸਮਾਜ ਹੈ ਇਹ ਅਗਲਾ ਸਮਾਜ ਹੋਗੀ ਬੇਅਗਲਾ ਦੀ ਜੇ ਅਰੇਚਾ ਜੋ ਆਈ ਹੈ ਅਰੇਚਾ ਦੇ ਬੱਚੇ ਨਹੀਂ ਜਾਣਦੇ ਅਰੇਚ ਬੱਚੇ ਨੂੰ ਤਾਂ ਜਾਣਦੇ ਹੋ ਉਧਰ ਵੀ ਜਾ ਰਹੀ ਹੈ ਗੱਲ ਇਹ ਗੁਰਵਾਲੀ ਤੋਂ ਦੂਰ ਦੂਰ ਗੁਰਵਾਲੀ ਤੋਂ ਜੇ ਉਲਟ ਕਾਰਨ ਇਹ ਹਤਾ ਉਹ ਜਿਹੜੀ ਅੱਜ ਉਹ ਸਭਿਤਾ ਪੀਸ ਆਫ ਵਰਲਡ ਭਰਦੀ ਹੈ ਪੀਸ ਆਫ ਵਰਲਡ ਨਹੀਂ ਮਿਲ ਸਕਦਾ ਉਦੋਂ ਪੀਸ ਆਫ ਵਰਲਡ ਮਿਲੂ ਆਪਣੇ ਵਿਚਾਰ ਧਾਰਾ ਬਦਲ ਨਹੀਂ ਬਾਬਾ ਜੀ ਇਆਂ ਤੁਸੀਂ ਕਹੇ ਵੀ ਜੋ ਇਹ ਪੱਛਮ ਦੀ ਸਭਿਤਾ ਦਾ ਪ੍ਰਭਾਵ ਸਾਡੇ ਤੇ ਪੈ ਚੁੱਕਾ ਅੱਜ ਤੇ ਇਹ ਦੋਸਤੀ ਕਿਉਂ ਨਹੀਂ ਕਰਨੀ ਚਾਹੀਦੀ ਬੱਚੇ ਨਾਲ ਜਾਂ ਇਹਦੀ ਜਗ੍ਹਾ ਤੇ ਕੀ ਕਰਨਾ ਚਾਹੀਦਾ ਬੱਚੇ ਨੂੰ ਜੇ ਤੁਸੀਂ ਦੋਸਤੀ ਕਰੋ ਬਰਾਬਰ ਦਾ ਰੱਖਦੇ ਤੁਸੀਂ ਉਹਨੂੰ ਸਕਦੇ ਸਿਆਣਾ ਬਣਾਏ ਨਹੀਂ ਸਕਦੇ ਜਾਂ ਤਾਂ ਤੁਸੀਂ ਵੀ ਸਿਆਣੇ ਨਹੀਂ ਹੈਗੇ ਜਾਂ ਤਾਂ ਤੁਸੀਂ ਆਪ ਵੀ ਸਿਆਣੇ ਦੀ ਵਾਲੇ ਹੀ ਹੋ ਥੋੜਾ ਤਾਂ ਬਰਾਬਰ ਹੋ ਗਿਆ ਤੁਹਾਡੇ ਆਪਣੀ ਗੱਲ ਬਣਾਉ ਇੱਕ ਤੂੰ ਉਹਨੂੰ ਬਣਾ ਲੈ ਕੋ ਬਣਾ ਲੂਗਾ ਬਰਾਬਰ ਹੋ ਗਿਆ ਤੁਸੀਂ ਹਮ। ਸਿਆਣਾ ਕਿਵੇਂ ਬਣੂਗਾ? ਸਿਆਣਾ ਬਣੇ ਨਹੀਂ ਸਕਦਾ ساری ਉਮਰ। ਤਾਂ ਤੁਸੀਂ ਸਿਆਣੇ ਹੋ ਨਾ ਉਹ ਸਿਆਣ। ਕੀ ਇਹਦਾ ਮਤਲਬ ਬੱਚੇ ਤੇ ਕੇ ਰੱਖਿਆ ਜਾਵੇ? ਰੋਗ ਨਹੀਂ ਹੋਵੇ। ਰੋਗ ਹੋਰ ਗੱਲ ਹੈ। ਅਕਲ ਦਾ ਰੋਗ ਹੋਵੇ। ਅਕਲ ਦਾ ਰੋਗ ਹੋਵੇ, ਗੁੱਸੇ ਦਾ ਰੋਗ ਨਹੀਂ ਹੋਵੇ, ਗਿਆਨ ਦਾ ਰੋਗ ਨਹੀਂ ਹੋਵੇ, ਅਕਲ ਦਾ ਹੋਵੇ, ਪ੍ਰੈਸ਼ਰ ਹੋਵੇ। ਅਕਲ ਦੀ ਗੱਲ ਮੰਨੋ, ਬੇਗਲੀ ਦੀ ਨਹੀਂ ਬੰਦੀ। ਅਸੀਂ ਤਾਂ ਬੇਗਲੀ ਤਾਂ ਵੀ ਬੰਦੀ ਜਾਂਦੇ। ਬੇਗਲੀ ਨਹੀਂ ਹੁੰਦੀਆਂ ਇਹਨਾਂ ਗੱਲਾਂ ਜਿਆਦਾ ਬੁੱਢੇ ਬੱਚੇ ਕਹਿੰਦੇ ਹੱਥਾਂ ਚੋਂ ਨਿਕਲ ਗਏ ਨਿਕਲ ਤੁਸੀਂ ਪਹਿਲਾਂ ਜਿਹੜੇ بڑے ਆਦਮੀ ਨੇ ਜਿਹੜੇ بڑے ਬੱਚੇ ਨੇ بڑے ਜਿਹੜੇ ਪੜ੍ਹਾਈ ਆ ਤੇ ਡਿਸਪਲਿਨ ਕੀ ਹੈ ਜੇ ਬੱਚੇ ਦੀ ਗੱਲ ਬਰਾਬਰ ਰੱਖੋਗੇ ਡਿਸਪਲਿਨ ਨਹੀਂ ਹੋਣਾ ਤੁਹਾਡਾ ਕਦੇ ਵੀ ਡਿਸਪਲਿਨ ਜਿਹੜੇ ਕਾਲਜਾਂ ਦਾ ਸਕੂਲਾਂ ਦਾ ਵਧੀਆ ਹੁੰਦਾ ਬੱਚੇ ਪ੍ਰੈਸ਼ਰ 'ਚ ਰਹਿੰਦੇ ਨੇ ਡਿਸਪਲਨ ਪਾਇਦਾ ਵੀ ਡਿਸਪਲਨ ਜੀ ਜੇ ਜੇ ਡਿਸਪਲਨ ਬਿਲ ਟੈਨ ਰੱਖਿਆ ਨਹੀਂ ਜਾ ਸਰਕਾਰ ਤੇ ਅਭਰਾ ਤਾਂ ਬਰੀ ਹੋ ਜੂਗੀ ਜੇ ਪ੍ਰੈਸ਼ਰ ਨਹੀਂ ਸਰਕਾਰ ਦਾ ਚੱਲੇ ਚੱਲ ਕਦੇ ਸਕਦੀ ਹੈ ਸਰਕਾਰ ਲੋਕ ਕਾਨੂੰ ਸਕਦੇ ਕਾਨੂੰਨ ਉਰ ਮਤਲਬ ਕਰਦਾ ਸਾਨੂੰ ਪ੍ਰੈਸ਼ਰ ਰੱਖਦਾ ਆਪਣਾ ਕਰੂ ਤਾਂ ਹੀ ਮੰਨਦੇ ਕਾਲੂ ਦੂ ਐਸਾ ਨਹੀਂ ਮੰਨ ਸਕਦੇ ਲੋਕ ਡਿਸਪਲਨ ਰਹਿਣ ਵਾਸਤੇ ਤੁਹਾਨੂੰ ਪ੍ਰੈਸ਼ਰ ਤੇ ਰੱਖਣਾ ਹੀ ਪਊ ਆਪਣੇ ਬੰਦੂ ਬੱਦਦਾ ਸੋਜ ਰਹਿ ਵਿੱਚ ਬੱਦੀ ਵੇਖ ਕੋ ਦਾਦਾਰ ਦੀਦਾਰ ਇਹ ਬਲਦੇ ਪਾਵਰ ਦੀ ਉਹ ਨਹੀਂ ला ਸਕਦਾ ਗਿਆਨ ਕਦੇ ਹਾਸਲ ਕਰ ਸਕਦਾ ਦਿਖਾਵੇ ਹੋਵੇ ਨਹੀਂ ਹੋ ਸਕਦੇ ਜ਼ਿੰਦਗੀ ਦੇ ਵਿੱਚ ਗੁਰਤੇ ਪੱਵਦੀ ਲਾਉਣੀ ਡਿਸਪਲਨ ਜੇ ਤੁਸੀਂ ਬੱਚੇ ਦੇ ਪੱਵਦੀ ਲਾਉਂਗੇ ਤਾਂ ਪ੍ਰੈਸ਼ਰ ਹੈ ਉਹ ਸਮਝਾ ਕੇ ਤੇ ਆ ਕੇ ਲਾਉਣਾ ਚਾਹੀਦਾ ਲਾਜਵਾਬ 라 ਜਵਾਬ ਕਰਕੇ ਬਾਣੀ ਜਾਨੂੰ ਲਾਜਵਾਬ ਕਰਦੀ ਹੈ ਜੀ ਅਕਲ ਹੈ ਕਿ ਲਾਜਵਾਬ ਕਰ ਦੁੱਤੀ ਕਿਉਂ ਚਾਹੋ ਤੇ ਕੋ ਜਵਾਬੇ ਦੀ ਹੱਪੇ ਚੁੱਪ ਕਰੂਗਾ ਇਹ ਨਹੀਂ ਗੱਲ ਮੰਨੀ ਜਾ ਸਕਦੀ ਇਸ ਤੇ ਨੁਕਸਾਨ ਅਸੀਂ ਤਾਂ ਕਹਿੰਦੇ ਹੀ ਗੱਲ ਉਹਨਾਂ ਨੇ ਮਗਰ ਲੱਗ ਜਾਂਦੇ ਨੇ ਬੱਚਿਆਂ ਨੇ ਇਹ ਬੇਅਕਲਾਂ ਦੀ ਗੱਲ ਹੈ ਜਿਹੜੀ ਮਗਰ ਲੱਗਦੇ ਆਪਣੇ ਆਪ ਨੂੰ ਦੀ ਹਾਂਜੀ ਅੰਨੀ ਪਾਣੀ ਅੰਦਰ ਲੀਕ ਜਿਉਂ ਕਿਸਦਾ ਥਾਉ ਨਾ ਥੇ ਆਹ ਜੇ ਪਾਣੀ ਦੀ ਲਕੀਰ ਗੱਡੀਆਂ ਨਾਲ ਵੀ ਨਾਲੇ ਬਿੜ ਜਾਂਦੀ ਹੈ ਥਾਉ ਪਾਣੀ ਦੇ ਵਿੱਚ ਲਕੀਰ ਵਾਲੀ ਉਹ ਹੈ ਸਾਡੀ ਬੱਚਿਆਂ ਦੀ ਜਿਹੜੀ ਪੜਾਈ ਹੈ ਬਸ ਬਾਈ ਫਿਰ ਬੱਚਿਆਂ ਨੂੰ ਪੜ੍ਹਾਈ ਕਿੱਦਾਂ ਦੀ ਚਾਹੀਦੀ ਐ ਗੁਰਬਾਣੀ ਦੇ ਧਾਰਨ ਰਹੀ ਆ ਸੀਗਾ ਹੁਣ ਗਿਆ ਉਹ ਡਕਲ ਕਰਦੇ ਨੇ ਬੱਚੇ ਉਹ ਤੇ ਚਾਕੂ ਗੱਡ ਕੇ ਰੱਖਦੇ ਨੇ ਸਾਨੂੰ ਹਟਾ ਕੇ ਦਿਖਾਓ ਕੀ ਗੱਲਾਂ ਹੋਈਆਂ ਕਿਉਂ ਕੋਈ ਟੀਚਰ ਦਾ ਰੋਵ ਨਹੀਂ ਬੰਦਾ ਉਹ ਕਹਿੰਦਾ ਤੂੰ ਤਾਂ ਨੌਕਰ ਐ ਸਾਡਾ ਅਗੇ ਗੁਰੂ ਕਹਿੰਦੇ ਸੀ ਉਹ ਨੌਕਰ ਕਹਿੰਦੇ ਨੇ ਇਹ ਵੀ ਗੱਲ ਗਲਤ ਹੈ ਕਿ ਅਸੀਂ ਪੈਸਿਆਂ ਨੂੰ ਭਾਈ ਨੂੰ ਵਿਜ਼ਿਟਰ ਬਣਾ ਲਿਆ ਇਹ ਵੀ ਗੱਲ ਗਲਤ ਹੈ ਕਿ ਉਹ ਕਹਿੰਦਾ ਵਿਦਿਆਰਥੀ ਨੂੰ ਵੀ ਕਰਵਾਉਣੀ ਪਾਣਾ ਬੰਦੀ ਸਭ ਕੁਝ ਇਹ ਸਿਸਟਮ ਬਦਲ ਗਿਆ ਉਲਟਾ ਫੁਲਟਾ ਹੋਇਆ ਹੈ ਜਿਵੇਂ ਅੱਜ ਸਿੱਖਾਂ ਸਿੱਖਾਂ ਵੱਲੋਂ ਸਕੂਲ ਕਾਲਜ ਖੋਲੇ ਗਏ ਆ ਤਾਂ ਉੱਥੇ ਕੀ ਲਗ ਗੁਰਵਾਨੀ ਅਨੁਸਾਰ ਕੀ ਲਾਗੂ ਹੋਣਾ ਚਾਹੀਦਾ ਹੈ ਕੀ ਤਨਖਾਹ ਦਾ ਮੁਲਾਜ਼ਮ ਨਹੀਂ ਰੱਖਣੇ ਚਾਹੀਦੇ ਪੜਾਉਣ ਵਾਲੇ ਸਾਨੂੰ ਸਿੱਖਾਂ ਨੂੰ ਬੋਲਕ ਚਾਹੀਦੀ ਹੈ ਸਕੂਲ ਅਸੀਂ ਸਰਕਾਰ ਖੋਲੇ ਇਹ ਤਾਂ ਮਨਮੁਖੜ ਦੀ ਸਭ ਕੁਝ ਉਹਨਾਂ ਦਾ ਕਹਿਣਾ ਕਿ ਸਿੱਖ ਬੱਚੇ ਪੜ ਜਾਣਗੇ ਉਹਨੂੰ ਦੂਰ ਕਦਰਾਂ ਫਾਨ ਬਗੈਰ ਸਿੱਖ ਅਸੀਂ ਗੈਰ ਸਿੱਖਾਂ ਨੂੰ ਪੜਾ ਕੇ ਸਿੱਖ ਬਣਾਉਂਦੇ ਉਹਦਾ ਕੰਮ ਰਹਿ ਗਿਆ ਗੁਰੂਆਂ ਨੇ ਗੈਰ ਸਿੱਖ ਪੜਾ ਕੇ ਸਿੱਖ ਬਣਾਏ ਨੇ ਤੇ ਸਿੱਖਾਂ ਦੇ ਜਿਹੜੇ ਸੰਖਿਆ ਗੋਲ ਸਿੱਖਾਂ ਨੂੰ ਖੜਾ ਕੇ ਵਾਰਦੇ ਨਾਲੇ ਇਹ ਸਿੱਖਾਂ ਦੇ ਬੱਚੇ ਕਾਲਜਾਂ ਦੇ ਪੜੇ ਹੋਏ ਬਈ ਬੇਵੰਦੀ ਕਰਦੇ ਕਿਉਂ ਕ腐ਸ਼ਨ ਨਹੀਂ ਕਰਦੇ ਜੀ ਉਹਨਾਂ ਦੇ ਪੰਜੇ ਫਰਕੇ ਕੋਈ ਨਹੀਂ ਕਾਲਜਾਂ ਦੇ ਵਿੱਚ ਫਿਰ ਸਿੱਖਾਂ ਦੇ ਕਾਲਜ ਕੋਹਰ ਦਾ ਗੁਰੂ ਨੂੰ ਬਦਲਾਅ ਕਰਦੇ ਸਵਾ ਗੋਲਕ ਕੱਟ ਕਰਦੇ ਸਵਾ ਕੀ ਹੈ ਗੋਲਕ ਦੇ ਪੈਸੇ ਤੋਂ ਬੇਈਮਾਨ ਪੈਦਾ ਕਰਦੇ ਅਸੀਂ ਉਹ ਜਿਹੇ ਪੈਸੇ ਆਨੇ ਦੇ ਉਹਦਾ ਫਿਰ ਫਰਕੇ ਮਿਟ ਗਿਆ ਹਾਂ ਅਸੀਂ ਕੋਈ ਸਪੈਸ਼ਲ ਚੀਜ਼ ਬਣਾ ਕੇ ਦਦੇ ਜੇ ਵਿਦਿਆਵੀ ਪੜਾਉਂਦੇ ਉਹਨਾਂ 'ਚ ਨੈਤਿਕਤਾ ਹੁੰਦੀ ਥੋਟ-ਥੋਟ ਕੇ ਪਾਈ ਹੁੰਦੀ ਫੇਰ ਚਲੋ ਉਹ ਗੱਲ ਵੀ ਬਣ ਜਾਂਦੀ ਵੀ ਚਲੋ ਵੀ ਅਸੀਂ ਕੁਝ ਬੱਚੇ ਤੇ ਆਮ ਦੁਨਿਆਵੀ ਬੱਚਿਆਂ 'ਚ ਕੋਈ ਡਿਫਰੈਂਸ ਹੈ ਨਹੀਂ ਨਾ ਜਲ ਜਾਂ ਸਕੂਲ ਬੱਚਿਆਂ 'ਚ ਜੇ ਡਿਫਰੈਂਸ ਹੈ ਦੇ ਪੈਸੇ ਖਰਚ ਕਰਦੇ हां ਇਹਨਾਂ ਦੀ ਸੱਚੀ ਗੱਲਾਂ ਨੇ ਸੱਚੀ ਗੱਲ ਹੈਗਾ ਵੀ ਬਈ ਸਪਾਰਸ਼ ਚਲ ਕਰਤੀ ਤੈਨੂੰ ਦਾਖਲਾ ਮਿਲ ਜੂ ਸਾਡੇ ਰਿਸ਼ਤੇਦਾਰ ਨੂੰ ਮੇਰੇ ਬੱਚਿਆਂ ਨੂੰ ਡੋਨੇਸ਼ਨ ਦੀ ਜੜੀ ਕੋ ਉਹ ਜਾਣਗੇ ਫ੍ਰੀ ਚ ਆ ਗੱਲਾਂ ਨੇ ਹੋਰ ਤਾਂ ਕੁਝ ਨਹੀਂ ਐ ਲੈ ਕੇ ਜੀ ਜਿਸੂ ਦਾ ਔਰ ਸਿੱਕੀ ਦਾ ਦਵਾਲਾ ਕਰਦਾ ਇਹ ਵੀ ਅਪਰਾਧ ਹੈ ਆਦ ਕੀਤਾ ਅਵਾਰਦ ਦੇ ਖਵੇਜਾ ਵੀ ਭੁਗਤ ਰਹੇ ਹੋਰ ਵੀ ਭੁਗਤ ਲਗੇ ਕਪੜਾ ਤਾਂ ਅਜੋ ਵੀ ਲਗਾਤਾਰ ਹੋ ਰਿਹਾ ਹਟ ਜਾਊਗਾ ਜਦੋਂ ਐਂਡ ਜਿਹਾ ਜੱਜ ਕਰਿਆ ਚੀਜ਼ ਦਾ ਐਂਡ ਹੋਣਾ ਹਟੇ ਉਹ ਸਵੇਰ ਆ ਜਾਂਦਾ ਫਿਰ ਹਟ ਵੀ ਜਾਂਦੇ ਪੱਥਰ ਚਟਕੇ ਬੱਚੀ ਆਪੇ ਬੋਲਣਾ ਹੀ ਪੈਂਦੇ